हर चरण सरेने को बिंदे दुख पंजना हर चरण सरेने को बिंदे दुख पंजना हर चरण सरेने को बिंदे दुख पंजना ਸੇ ਆਪਨੇ ਕੋ ਨਾਮ ਦੇਵੋ ਹਰ ਚਰਨ ਸਰਨ ਕੋ ਬਿੰਦ ਜੋ ਖਰ ਮੰਤ ਨਾ ਚਰਨ मिंदई दुख बंजना रे चरन शरण को मिंदई दुख बंजना दास आपने को नाम देवो दास आपने को नाम देवो दास आपने ਆਪ ਨੇ ਕੋ ਉਵੇਂ ਤਦ ਹੋਰ ਜੇ ਮੰਗਣਾ ਵੇਨਾ ਵੇਨਾ ਤਦ ਹੋਰ ਜੇ ਮੰਗਣਾ ਉਵੇਂ ਤਦ ਹੋਰ ਜੇ ਮੰਗਣਾ ਸਿਰ ਦੁਖਾਂਦੇ ਦੁਖ ਦੇ ਨਾਮ ਸੰਤੋ ਕੀਆ ਉਤਰਾ ਮਨ ਕੀ ਪੋਖ ਉਤਰੈ ਮਨ ਕੀ ਪੋਖ ਦਾਸ ਆਪਨੇ ਕੋ ਨਾਮ ਦੇਵੋ ਦਾਸ ਆਪਨੇ करता तू करता तू मेरा जजमान ਦੇਵੋ दखना तय पे मांगो देवा अपना नाम दास अपने का नाम देवा दास अपने ਚੈਲੇ ਸਾਰੇ ਬਿੰਦੈ ਦੁਖ ਪੰਜ ਨਹਾਰ ਕਰਨ ਸਾਰੇ ਨੇ ਬਿੰਦੈ ਦੁਖ ਪੰਜ ਨਹਾਰ ਕਰਨਾ ਦਾਸ ਆਪਨੇ ਕੋ ਨਾਮ ਦਿਵੋ ਦਾਸ ਆਪਨੇ ਕੋ ਨਾਮ ਦਿਵੋ ਹਰਿ ਦੇਸ਼ ਤੇ ਪ੍ਰਭਾਧਾਰ ਕੇਰਵਾ ਕਾਰੀ ਤਾਰ ਦੇਸ਼ ਤੇ श्रेष्ठ प्रभा धारो कृपा कार बने निसा सारे निदा पद मप गमप मप गमप गमप गमप मगरे सरे निसा गमप पा म ग म प नि दाओ पा पा म ग म प ਕਾਦੇ ਨਿਵੋ ਪੂਜਾ ਐਸੇ ਆਪਨੇ ਤੋ ਨਾਮ ਦੇਵ ਹਰ ਚੈਰੇ ਲੈ ਸਾਰੇ ਨੇ ਦੁਖ ਭੰਜਨ ਹਰ ਚੈਰੇ ਲੈ ਸਾਰੇ ਨੇ ਕੋ ਕਉਂ ਅੰਧ ਮਾ ਆ ਕੇ ਤੇ ਮਤ ਕਾਉ ਅੰਧ ਮਾ اے بندے ہم کر اس دھی کو ਸੁਨੇ ਪੁਕਾਰਾ ਮਨ ਕੋ ਦੇਕਾਰ ਅੰਧ ਮਾਇਆ ਕੇ ਬਾਰੇ ਦਗਾ ਮਨ ਕੋ ਦੇਕਾਰ ਅੰਧ ਤੁਮ ਕਹੀਏ ਤੋ ਜਗਤ ਗੁਰਸਵਾਮੀ ਤੁਮ ਕਹੀਏ ਤੋ ਜਗਤ ਗੁਰਸਵਾਮੀ हम कहियत कल झुक के कामी कामी काम क्रोध के काहरिया धमाया के भर अनक धोखा तान छाद prab binaa nayana na thainehara prab binaa nayana na khainehara prab binaa nayana na khainehara naam simrao sarane su हार चरन सरने बिनय दुख बंजन हार चरन सरने बिनय दुख बंजन दास अपने को नाम देवो दास अपने को नाम देवो हार चरन सरने बिनय दुख बंजन हार ਕਬਨ ਹਾਰ ਚਰਨ ਪਤ ਤੈ ਉਧਾਰ ਨਾ ਜੀਂਦੇ ਤਾਰੇ ਉਧਾਰ ਨਾ ਜੀਂਦੇ ਤਾਰੇ ਨਾ आ सुख है सागर ब्रह्मरत्नजरा गुण सुख है सागर पमगम बनी द पमगरे सनिसगम पगगम बनी स गुण सुख है सागर ब्रह्मरत्नजरा गुण सुख है सागर ਆ ਮਾ ਗਮ ਬਾਨੀ ਦਬਾ ਦਾਦਾ ਮਾ ਬ ਦਬਾ ਮਾ ਬ ਗਮ ਬਾਨੀ ਦਬਾ ਮਾ ਬ ਗਮ ਮ ਬ ਗਮ ਮ ਗਾਰੇ ਦਾ ਬਾਨੀ ਸਾਰੇ ਜਾਨੀ ਬਾਨੀ ਸਾਰੇ ਜਾਨੀ ਬਾਨੀ ਸਾਰੇ ਜਾਨੀ ਧਾਪਾ ਮਾ ਗਰੇ ਸੋਨ ਸੁਖ ਹੈ ਸਾਗਰਾ ਗੋਨਾ ਸੁਖ ਹੈ ਸਾਗਰਾ ਬ੍ਰਹਮ ਰਾਇ ਇਤਨਾ ਗਰਾ ਸੁਖ ਸਾਗਰਾ ਆ sukh sagara guna sukh sagara aa guna sukh sagara guna sukh sagara aa guna sukh sagara guna sukh sagara ਗੁਨਾ ਸੁਖ 사ਗਰਾ ਗੁਨਾ ਸੁਖ 사ਗਰਾ ਬ੍ਰਹਮ ਨਾਗਰਾ ਪਗਤ ਵਛੈ ਲੈਨਾ ਮੈਂ ਕੇਦਾਯੋ ਪਗਤ ਵਛੈ ਲੈਨਾ ਮੈਂ ਕੇਦਾਯੋ ਘਰ ਚਰਨ ਸਾਇਰੇ ਦੁਖ ਪਰ ਜਨ ਹਾਰੇ ਚਰ ਰਣੇ ਕੋ ਬਿੰਦੈ ਦੁਖ ਪਰ ਜਨ ਆ ਨਾਮ ਦੇਵੋ ਦਾਸ ਆਪਨੇ ਕੋ ਨਾਮ ਦੇਵੋ ਹਰ ਚਰਨ ਸਰਨੇ ਬਿੰਦੈ ਦੁਖ ਪਰ ਹਰ ਚਰਨ ਸਰਨੇ ਬਿੰਦੈ ਦੁਖ ਬੰਨਨ ਹਰ ਚਰਨ ਸਰਨੇ